फिर ਉਸਨੇ ਮੈਨੂੰ ਦੱਸਿਆ ਵੀ ਸਾਡੇ ਕਰਜ ਕਦੀ ਕੋਈ ਬਿਮਾਰੀ ਹੁੰਦੀ ਸੀ ਕੋਈ ਸਰੀਰਕ ਦੁੱਖ ਹੁੰਦਾ ਸੀ ਨਾ ਸਿਰਫ ਉਹ ਸਤਿਗੁਰਾਂ ਦੀ ਚਰਨ ਧੂੜ ਅਸੀਂ ਕੋਲ के ਪਾ ਦਿੰਦੇ ਹਾਂ ਤੇ ਸਾਨੂੰ ਅਰਮਾਨ ਆ ਜਾਂਦਾ ਸੋ ਇਸ ਵਾਸਤੇ ਉਹਦੇ ਵਿੱਚ ਵਿਸ਼ੇਸ਼ਤਾ ਕੀ ਹੁੰਦੀ उस ਚਰਨ ਤੂੜੀ ਵਿੱਚ ਵਿਸ਼ੇਸ਼ਤਾ ਕੀ ਹੁੰਦੀ ਆ ਵੀ ਜਿਹੜੇ ਆਉਂਦੇ ਨੇ ਨਾ ਮੱਥਾ ਟੇਕਣ ਉਹਨਾਂ ਦੀ ਆਤਮਾ ਸ਼ੁੱਧ ਹੁੰਦੀ ਆ ਉਹ ਈਸ਼ਵਰ ਚਿੰਤਨ ਕਰਦੇ ਨੇ ਉਹਨਾਂ ਦੇ ਮਨ ਵਿੱਚ ਕੋਈ ਉਸ ਉਹ ਤੜ ਭੈੜਾ ਫੜਨਾ ਹੁੰਦਾ ਚਲੋ ਮੈਂ ਮੰਨ ਲੈਣਾ ਹਜ਼ਾਰਾਂ ਵਿੱਚੋਂ ਕੋਈ ਚੰਦਰਾ ਹੋਏਗਾ ਜਿਹਦੇ ਮਨ ਵਿੱਚ ਤੋ ਇਸ ਵਾਰ ਤੇ ਉਹਨਾਂ ਦੀ ਆਤਮਾ ਸ਼ੁੱਧ ਹੁੰਦੀ ਹੈ ਤੇ ਉਹਦੇ ਜਿਹੜੇ ਫੁੱਲਨੇ ਨੇ ਨਾ ਉਸ ਹਵਾ ਮੰਡਲ ਵਿੱਚ ਫਿਰੇ ਹੁੰਦੇ ਨੇ ਕਿਉਂ ਹਵਾ ਵੀ ਪਵਿੱਤਰ ਹੁੰਦੀ ਹੈ ਅਸਮਾਨ ਵੀ ਪਵਿੱਤਰ ਹੁੰਦੀ ਹੈ ਉਹਨਾਂ ਦੀ ਜਿਹੜੀ ਭਾਵਨਾ ਦਾ ਉਹ ਉਸ ਮਿੱਟੀ ਵਿੱਚ ਪਈ ਹੁੰਦੀ ਹੈ ਤੇ ਉਹ ਭਾਵਨਾ ਅੱਗੇ ਜਾ ਕੇ ਉਹਨਾਂ ਦਾ ਜਿਹੜਾ ਕੰਮ ਹੈ ਉਹ ਸਵਾਰੀ ਜਿਸ ਤਰ੍ਹਾਂ ਜਿੱਥੇ ਦਰਦਰੀ ਆਦਮੀ ਰਹਿੰਦਾ ਠਾਗਾ ਜਾਂਦਾ ਹੁੰਦਾ ਹੈ ਕੱਚਾ ਮੈਲੀਆਂ ਹੁੰਦੀਆਂ ਨੇ ਕੁਰਤੇ ਪਹਿਰੇ ਹੁੰਦੇ ਨੇ ਬੋਪੇ ਆਉਂਦੀ ਹੱਥ ਨਹੀਂ ਸਵਾਦਰ ਤੋਂ ਪੋਵੇ ਰੀ ਤੋਂ ਕੇ ਰੱਖਦੇ ਮੇਰੇ ਵਰਗੇ ਉਦਵੀ ਆਦਮੀ ਬਹੁਤ ਜਿੱਥੇ ਦਿਲਦਰੀ ਰਹੇ ਨਾ ਉਹ ਜੀ ਹੋ ਗਈ ਗੱਲ ਫੇਰ ਤੇ ਉਹ ਦਿਲਦਰੀ ਜਿੱਥੇ ਹੁੰਦੇ ਨੇ ਨਾ ਉਹ ਵਾਯੂ ਮੰਡਲ ਖਰਾਬ ਕਰ ਦਿੰਦੇ ਨੇ ਤੇ ਜਿੱਥੇ ਉਦਮੀ ਹੁੰਦੇ ਨੇ ਨਾ ਐ ਸਾਫ਼ ਸੁਥਰਾ ਥਾਂ ਰੱਖਦੇ ਨੇ ਕੱਪੜੇ ਸੋਹਣੇ ਰੱਖਦੇ ਨੇ ਪਤਾ ਲੱਗਦਾ ਵੀ ਇੱਥੇ ਕੋਈ ਬੰਦਾ ਰਹਿੰਦਾ ਤੇ ਸਾਧੂ ਰਹੀ। ਇਸੇ ਤਰ੍ਹਾਂ ਜਿੱਥੇ ਬਦਮਾਸ਼ ਤੇ ਚੋਰ ਤੇ ਯਾਰ ਤੇ ਸ਼ਰਾਬੀ ਤੇ ਯਾਰੀ ਦੇ ਬੇਚਾਰੇ ਤੇ ਝੂਠ ਬੋਲਣ ਵਾਲੇ ਰਹਿੰਦੇ ਨੇ ਨਾ ਉਹ ਸਾਰਾ ਵਾਯੂ ਖਰਾਬ ਕਰ ਦਿੰਦਾ। ਉਥੋਂ ਦਾ ਐਟਮਾਸਫੇਅਰ ਜਿਹੜਾ ਉਹ ਸਾਰਾ ਖਰਾਬ ਹੋ ਜਾਂਦਾ ਤੇ ਜਿੱਥੇ ਸਾਧੂ ਮਹਾਂਤਮਾ ਸੰਤ ਰਹਿੰਦੇ ਹਨ ਉਹ ਉਸੇ ਤਰ੍ਹਾਂ ਹੀ ਸਾਰਾ ਵਾਯੂ ਮੰਡਲ ਜਿਹੜਾ ਉਹ ਠੀਕ ਕਰਦੇ ਹਨ ਇਸ ਵਾਸਤੇ ਇਹ ਜਿਹੜਾ ਉਹਨਾਂ ਦੀ ਭਾਵਨਾ ਹੈ ਨਾ ਉਸ ਮਿੱਟੀ ਦੇ ਵਿੱਚ ਭਾਵਨਾ ਹੁੰਦੀ ਉਹ ਭਾਵਨਾ ਦੇ ਨਾਲ ਅੱਗੇ ਜਾ ਕੇ ਜਿਹੜਾ ਲੋਕਾਂ ਦੇ ਉਹ ਦੁੱਖ ਦੂਰ ਹੋ ਜਾਂਦੇ ਨੇ ਤੇ ਇਹਨਾਂ ਭਾਵਨਾਵਾਂ ਦੇ ਨਾਲ ਸਾਰਾ ਕੁਝ ਠੀਕ ਹੁੰਦਾ ਇਹਨਾਂ ਵਿੱਚ ਸਾਰਿਆਂ ਨਾਲ ਵਿਸ਼ੇਸ਼ ਚਰਨਾਂ ਦੀ ਧੂੜੀ ਲਿਖੀ ਹੈ ਉਹ ਜਿਹੜੀ ਚਰਲਾ ਦੀ ਢੂੜੀ ਆ ਨਾ ਉਹ ਤੇ ਇਸੇ ਤਰ੍ਹਾਂ ਕਰਦੀ ਐ ਫਿਰ ਜਿਹੜਾ ਪਾਰਸ ਹੈ ਨਾ ਉਹ ਤੇ ਲੋਹੇ ਤੋਂ ਸੋਨਾ ਕਰ ਦਿੰਦਾ ਨਾ ਤੇ ਫੇਰ ਵੀ ਭਾਵੇਂ ਸੋਨਾ ਹੋ ਜਾਂਦਾ ਲੋਹੇ ਤੋਂ ਪਰ ਰੇਂਦੀ ਤਾਂ ਦੀ ਐ ਨਾ ਰਹਿੰਦਾ ਨਾ ਫੇਰ ਵੀ ਉਹਦੀ ਫਰਕ ਤੇ ਨਹੀਂ ਕੀ ਤੇ जेड़े ਇਹ ਜਿਹੜੇ ਸਤਗੁਰਾਂ ਦੀ है ਧੂੜੀ ਹੈ ਨਾ ਉਹ ਉਹਦੀ ਆਤਮਾ 'ਚ ਪ੍ਰਕਾਸ਼ ਕਰ ਦਿੰਦੀ ਏ ਆਤਮਾ 'ਚ ਪ੍ਰਕਾਸ਼ ਹੋਣ ਕਰਕੇ ਗਿਆਨ ਵਜਦਾ ਹੈ ਤੇ ਸਾਰਾ ਉਹਦਾ ਦੁੱਖ ਤੇ ਦਰਦ ਦੂਰ ਹੋ ਜਾਂਦੀ ਹੈ ਉਹ ਰੀ ਅਵਸਥਾ ਇੱਡੀ ਹੋ ਜਾਂਦੀ ਹੈ ਫਿਰ ਉਹ ਸਤਗੁਰਾਂ ਖਾਤ मिल ਜਾ ਮਨੂ ਤੂੰ ਮੈਂ ਲੈ ਕੇ ਤੇ ਮੱਥੇ ਤੇ ਲਾਲਾ ਤੇ ਮੇਰੇ ਕਰੋੜਾਂ ਜਨਮਾਂ ਦੇ ਦੁੱਖ ਤੇ ਦ੍ਰਿਗਰ ਦੂਰ ਹੋ ਜਾ ਤੇ ਫੇਰ ਕੂੜਾ ਲਾਲ ਜਿ ਛੱਡਿਆ ਹੋਏ ਇੱਕ ਮਾਰ ਹਲ ਖਿਚਿਆ ਆ ਕੂੜਾ ਦਾ ਝੂਠਾ ਵੀ ਕਰਦੇ ਨੇ ਤੇ ਸਦਗਰ ਕਈ ਵਾਰੀ ਕਰਦੇ ਹੁੰਦੇ ਇਹ ਕਿੱਥੇ ਧਰ ਦਿਓ ਕੂੜਾ ਉਹ ਫਿਰ ਜਾਂ ਆਪ ਜਾਂ ਜਾਂ ਉਹ ਦੂਰ ਸੁਟ ਕੇ ਆਏ ਜਿਹੜਾ ਇੱਥੇ ਨਗਰ ਨਹੀਂ ਜਾ ਨਿਗਾ ਵੀ ਨਾ ਪੈ ਪਰ ਉਹ ਸੁਟ ਕੇ ਆਏ ਇੱਥੇ ਕੋਲ ਸੁਟਿਆ ਵੀ ਕੂੜਾ ਜਿਹੜਾ ਕਿਸੇ ਨੂੰ ਪੈੜਾ ਨਾ ਲੱਗੇ ਉਹ ਲਾਲਚ ਜਿਹੜਾ ਉਹ ਕੂੜਾ ਕੂੜੇ ਕੂੜਾ ਦੀ ਕੂੜਾ ਇਸ ਤਰ੍ਹਾਂ ਦਾ ਲਾਲਚ ਹੈ ਲੱਭ ਬਿਨਾ ਹੈ ਮਾਨਸਾ ਚੋਂ ਪਾਣੀ ਢੂੜ ਇੱਕ ਲੱਭ ਹੈ ਤੇ ਇੱਕ ਲੋਭ ਹੈ ਇਹਨਾਂ 'ਚ ਥੋੜਾ ਥੋੜਾ ਫਰਕ ਕੋਈ ਖਾਸ ਫਰਕ ਨਹੀਂ ਹੁੰਦਾ ਇਸ ਵਾਸਤੇ ਜਿਹੜਾ ਲਾਲਚ ਹੈ ਨਾ ਉਹ ਕਿਸ ਤਰ੍ਹਾਂ ਕਰ ਦਿੰਦਾ ਜਿਸ ਤਰ੍ਹਾਂ ਪਾਣੀ ਉਤੇ ਬੂਰ ਆ ਜਾਂਦਾ ਨਾ ਤੇ ਬੂਰ ਦੇ ਆਉਣ ਕਰਕੇ ਪਾਣੀ ਦਾ ਰੰਗ ਵੀ ਬਦਲ ਜਾਂਦਾ ਤੇ ਪਾਣੀ ਦਾ ਸੁਭਾਅ ਵੀ ਬਦਲ ਜਾਂਦਾ ਇਸੇ ਤਰ੍ਹਾਂ ਇਨਸਾਨ ਦਾ ਵੀ ਲਾਲਚ ਜਦੋਂ ਆਉਂਦਾ ਉਹਦਾ ਕੰਮ ਹੀ ਖੋਤੇ ਕੂੜਾ ਲਾਲਚ ਛੱਡਿਆ ਹੋਰ ਸਮਾਨ ਛੱਡ ਕੇ ਉਸ ਜੋ ਨਹੀਂ ਰੱਖਿਆ ਜਾਣ ਵਾਲਾ ਪ੍ਰਮਾਤਮਾ ਹੈ ਇੱਕ ਮਨ ਹੋ ਕੇ ਉਸ ਫਲ ਤੇਰੇ ਹੋ ਪਾਇਆ ਜਿਵੇਂ ਹੀ ਕਾਰ ਕਮਾਇਆ ਉਹ ਜੇ ਫਲ ਕਾਰ ਕਰਦਾ ਜੇ ਹੋਗਾ ਪੂਰਬ ਲਿਖਿਆ ਪਿਛਲੇ ਜਨਮ ਦਾ ਕੋਈ ਸ਼੍ਰੇਸ਼ਟ ਕਰਮ ਕੀਤਾ ਹੋਵੇ ਉਹਦੇ ਮੱਥੇ 'ਚ ਕੋਈ ਲਿਖਿਆ ਹੋਵੇ ਫਿਰ ਕੀ ਹੁੰਦਾ ਤਾਂ ਤੂੜ ਕੇ ਫੇਰ ਗੁਰੂ ਦੀ ਸਾਧਵਾ ਦੀ ਧੂੜੀ ਫੇਰ ਮਿਲਦੀ ਹੈ ਭਾਵੇਂ ਤੋ ਬਗੈਰ ਇਸ ਨੇ ਮਿਲਦੀ ਤੇ ਫੇਰ ਕਹਿੰਦੇ ਨੇ ਕਿ ਧੂੜੀ ਮਿਲ ਤਾਂ ਕੀ ਹੈ ਫੇਰ ਕੀ ਹੋ ਜਾਦਾ ਜੇ ਧੂੜੀ ਮਿਲ ਜਾਗੀ ਕਹਿੰਦੇ ਨੇ ਜਦੋਂ ਧੂੜੀ ਮਿਲ ਜਾਂਦੀ ਹੈ ਨਾ ਬੜੀ ਕਿਰਪਾ ਹੁੰਦੀ ਹੈ ਉਹਨਾਂ ਦੀ ਸੇਵਾ ਕਰਨ ਨਾਲ ਛਿਰਕੀ ਆਖਰੀ ਪੰਕਤੀ ਵਿੱਚ ਦੱਸਦੇ ਨੇ ਕਹਿੰਦੇ ਨੇ ਮਤ ਥੋੜੀ ਸ਼ੇਰ ਗਵਾਇਆ ਕਈ ਮੇਰੇ ਵਰਗੇ ਗਿਆਨੀ ਇਹ ਰੱਤ ਕਰਦੇ ਨੇ ਜੀ ਸੇਵ ਵੀ ਨਹੀਂ ਛੱਡ ਦੇਣੀ ਚਾਹੀਦੀ ਭਾਬਾ ਥੋੜੀ ਥੋੜੀ ਸੇਵ ਵੀ ਕਰ ਛੱਡ ਦੇਣੀ ਚਾਹੀਦੀ ਸੇਵਾ ਬਹੁਤ ਨਾਲ ਕੀਤੀ ਜਾਤ ਇਹ ਨਹੀਂ ਗੱਲ ਇੱਥੇ ਇਹ ਗਲਤ ਅਰਥ ਹੈ ਇਹਦਾ ਮਤਲਬ ਹੈ ਮਤ ਥੋੜੀ ਥੋੜੀ ਮੱਤ ਜਿਹੜੀ ਹੈ ਭੈੜੀ ਮੱਤ ਜਿਹੜੀ ਹੈ ਮਲੀਨ ਮੱਤ ਜਿਹੜੀ ਹੈ ਕਬੂਦੀ ਹੈ ਜਿਹੜੀ ਉਹ ਕਿਸ ਤਰ੍ਹਾਂ ਜੀਂਦੀ ਹੈ ਸੇਵ ਕਮਾਈਏ ਭੈੜੀ ਮੱਤ ਜਿਹੜੀ ਭੈੜੀ ਮੱਤ ਹੋ ਗਈ ਇਨਸਾਨ ਦੀ ਮੱਤ ਚੰਗੀ ਹੋ ਗਈ ਤੇ ਫੇਰ ਉਹ ਕੋਈ ਪੜਾ ਕੰਮ ਹੀ ਨਾ ਕਰੇਗਾ ਕੰਮ ਹੀ ਪੈਰੇ ਉਦੋਂ ਕਰਦਾ ਜਦੋਂ ਉਹਦੀ ਮੱਤ ਭੈੜੀ ਹੁੰਦੀ ਹੈ ਸੋ ਇਸ ਵਕਤ ਮੱਤ ਥੋੜੀ ਸੇਵਗੁਆਈਏ ਸੇਵਾ ਕਰਨ ਕਰਕੇ ਉਹਦੀ ਮੱਤ ਭੈੜੀ ਜਿਹੜੀ ਉਹ ਨਾ ਸੋਚਦੀ ਸੇਵਾ ਬੜੀ ਵੱਡੀ ਚੀਜ਼ ਹੈ ਸੇਵਾ ਗੁਰੂ ਪੀਰ ਪਗੰਬਰ ਆਪ ਕਰਦੇ ਹਨ ਇਹ ਜਿੰਨੇ ਗੁਰੂ ਬਣੇ ਜੇ ਨਾ ਇਹ ਐਵੇਂ ਨਾ ਸਮਝੋ ਪਿਆਵੇਂ ਬਣ ਗਏ ਹਨ ਪਤਾ ਨਹੀਂ ਕਿਹੜਿਆਂ ਜਨਮਾਂ ਜੇ ਨਾ ਕਿੰਨਾ ਕੋ ਸੇਵਾ ਕੀਤੀ ਹੁੰਦੀ ਹੈ ਤੇ ਜਾ ਜਾ ਕੇ ਇਸ ਪਦ ਤੇ ਪਹੁੰਚਦੇ ਨੇ ਐਵੇਂ ਤੇ ਨਹੀਂ ਕਿ ਉੱਤੋਂ ਸਿੱਧੇ ਆ ਜਾ ਸੇਵਾ ਕੀਤੀ ਹੁੰਦੀ ਹੈ ਪਤਾ ਨਹੀਂ ਕਿੰਨਿਆਂ ਕੋ ਜਨਮਾਂ ਤੱਕ ਗੁਰੂ ਨਾਨਕ ਸੱਚੇ ਪਾਸ਼ਾ ਨੇ ਐਵੇਂ ਤੇ ਨਹੀਂ ਆਖਿਆ ਮੈਂ 36 ਉਹ ਤਪੱਸਿਆ ਕੀਤੀ ਫੇਰ ਚਾਰ ਜੋਤੀ ਕੀਤੀ ਤੇ ਫੇਰੇ ਹੋਂ ਕਿਹਾ ਤਾਂ ਤਪੱਸਿਆ ਕੀਤੀ ਹੁੰਦੀ ਹੈ ਤੇ ਸੇਵਾ ਕੀਤੀ ਹੈ ਹੁੰਦਾ ਤਾਂ ਆ ਕੇ ਇਸ ਤਰ੍ਹਾਂ ਗੱਲਾਂ ਹੁੰਦੀਆਂ ਨੇ ਆਪ ਗੁਰੂ ਸੇਵਾ ਕਰਦੇ ਆਂ ਮੈਂ ਸਤਿਗੁਰੂ ਆਖੋ ਤਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮੈਂ ਆਪਣੀ ਅੱਖੀਂ ਭਾਂਡੇ ਮਾਝਦੇ ਆਪ ਵੇਖਿਆ ਇਹਨਾਂ ਨੂੰ ਤੇ ਤੁਹਾਂ ਕਈ ਵਾਰੀ ਵੇਖੇ ਹੋਏਗਾ ਖਰੇ ਕਈਆਂ ਨੇ ਹੁਣ ਕਿਉਂ ਇਹਨਾਂ ਦਾ ਪਾੜਾ ਹੋਣਾ ਤੁਹਾਂ ਵੇਖੇ ਹੋਏਗਾ ਕੋਈ ਹੁਣ ਜਰਾ ਮੈਂ ਘੱਟ ਵੇਖਿਆ ਕਿਉਂ ਮੈਂ ਇਧਰ ਘਟਾਉਣਾ ਮੇਰਾ ਆਪਣਾ ਥਰੀਰ ਲਈ ਉਸੇ ਤਰ੍ਹਾਂ ਲੱਗਦਾ ਨਹੀਂ ਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੁੰਦੇ ਹਨ ਤੇ ਮੇਰੇ ਨਾਲ ਹੀ ਬੈਠ ਕੇ ਤੇ ਮੈਂ ਇਹਨਾਂ ਦੇ ਨਾਲ ਬੈਠ ਕੇ ਭਾਂਡੇ ਮਾਝਦੇ ਹੁੰਦੇ ਹਾਂ ਇਹਨਾਂ ਕੱਲ ਪਰਸੋਂ ਠਾਕੁਰ ਜੀ ਉੱਥੇ ਕਿਰਪਾ ਕੀਤੀ ਮ ਮੈਂ ਆਖਾ ਗਰੀਬ ਨਾ ਜੀ ਤੇ ਮੇਰਾ ਬੜਾ ਕਰਦਾ ਭਾਂਡੇ ਮਾਂਜਦੇ ਪਰ ਜਦੋਂ ਮੈਂ ਹੁਣ ਥੋੜਾ ਜਿਹਾ ਵੀ ਕੰਮ ਕਰਾਂ ਭਾਂਡਾ ਮੇਰੀ ਬਾਹ ਪੀਲ ਕਰਦੇ ਆਨੇ ਚਲੋ ਜੀ ਥੋਈ ਸੇਵਾ ਹੈ ਬੜੀ ਚੀਜ਼ ਇਹ ਖੋਰੇ ਮੇਰੀ ਸੇਵਾ ਖੋਣ ਮਾਸਦੇ ਇਹਨਾਂ ਕਿਰਪਾ ਕੀਤੀ ਹੈ ਬਚਾਲ ਵੀ ਤੇਰੀ ਇਹਦੇ ਨਾਲ ਯਾਹੀ ਲਾ ਦੇਣਾ ਨਾ ਇਹ ਤੈਨੂੰ ਛੱਡੇ ਐਸਾ ਇਹਨੇ ਪ੍ਰੇਮ ਕੀਤਾ ਮੇਰੇ ਹੈ ਜਿਹਦੇ ਨਾਲ ਪਿਆਰ ਕਰੀਏ ਇਹਨੂੰ ਛੱਡਣਾ ਨਹੀਂ ਚਾਹੀਦਾ ਇਹ ਹੁਣ ਕੀ ਕਹਾਂ ਦੀ ਪੰਡਿਤ ਤੇਰੇ ਨਾਲ ਪਿਆਰ ਪੂਰਾ ਕੀਤਾ ਤੈਨੂੰ ਲੈ ਕੇ ਜਾਵਾਂਗੇ ਛੱਡ ਕੇ ਨਹੀਂ ਤੈਨੂੰ ਜਾਣੀ ਤੈਨੂੰ ਕੱਲੇ ਨੂੰ ਨਹੀਂ ਛੱਡਦੀ ਮੈਂ ਨਾਲ ਲੈ ਜਾਵਾਂਗੀ ਸੋ ਮਤਲਬ ਇਹ ਹੈ ਵੀ ਸੇਵਾ ਐਸੀ ਚੀਜ਼ ਆ ਗੁਰੂ ਪੀਰ ਪਗੰਬਰ ਸੇਵਾ ਕਰਦੇ ਰਹਾ ਮੈਂ ਤੁਹਾਡੇ ਜੀ ਇਤਿਹਾਸਿਕ ਘਟਨਾ ਦੱਸਾਂ ਗਾ ਗੁਰੂ ਅਰਜਨ ਦੇਵ ਪੰਜਵੇਂ ਪਾਸ਼ਾ ਗਰਮੀ ਸੀਰਤ ਜੇਠ ਦੀ ਸੂਰਜ ਪਿਆ ਟਿਲ ਲਾਮ ਦਾ ਰਾ ਰਹਿਣ ਦੇ ਗਾ ਗੈਨ ਦਾ ਚੇਤਾ ਸੀ ਸੁੜਾ ਆਮ ਦਾ ਪਰ ਕਿੱਕੜ ਛੇ ਰੇ ਤੇ ਦੇ ਜ਼ਾਲਮ ਸੀ ਸਿਰ ਵਿੱਚ ਪਾਮ ਦਾ ਲੋਹ ਲਾਲ ਹੀਟੋ ਕਰਲ ਨੂੰ ਬਾਲਣ ਆਪੀ ਸੀ ਬਾਲਨ ਧਾਮ ਦਾ ਕਿ ਕਹਿਸੇ ਜ਼ਾਲਮ ਕਹੇ ਲੋ ਅਬ ਜਲੋਗੇ ਖਾਮ ਸੇ ਹੱਸ ਹੱਸ ਕੇ ਬੋਲੇ ਸ਼ਹਨਸ਼ਾਹ ਹਮ ਸ਼ਾਂਤ ਹੈ ਹਰੀ ਨਾਮ ਸੇ ਤਵੀ ਉਤੇ ਬੈਠੇ ਨੇ ਉਥੇ ਗੱਲ ਆ ਉਥੇ ਬੈਠਾ ਤੇਰਾ ਕੀ ਆ ਮੀਠਾ ਲੱਗ ਜਦੋਂ ਸਾਨੂੰ ਸੁੱਖ ਮਿਲ ਜਾਦਾ ਉਦੋਂ ਤੇ ਬਾ ਤੁਨ ਸੱਚੇ ਪਾਸ਼ਾ ਬੜਾ ਚੰਗਾ ਤਨ ਪਾ ਗਏ ਸੱਚੇ ਪਾਸ਼ਾ ਤੇਰੇ ਵਰਗਾ ਕੋਈ ਨਹੀਂ ਤੇ ਸਵਾਦ ਆ ਜਦੋਂ ਦੁੱਖ ਮਿਲੇ ਤੇ ਫੇਰ ਵੀ ਆਖੇ ਸੱਚੇ ਪਾਸ਼ਾ ਤੁਨ ਧੰਨ ਥੇਰ ਵਿਆਖੇ ਵਿੱਚ ਤੇਰੇ ਵਰਗਾ ਕੋਈ ਨਹੀਂ ਸਵਾਦ ਇਹ ਹੁੰਦਾ ਤੇ ਸੁਖ ਦੇ ਵਿੱਚ ਤੇ ਸਾਰੇ ਆਖਦੇ ਨੇ ਆਪਣੇ ਯਾਰਾਂ ਦੋਸਤਾਂ ਨੂੰ ਤੇ ਗੁਰੂਆਂ ਪੀਰਾਂ ਨੂੰ ਸਾਰੇ ਆਖਦੇ ਨੇ ਪਰ ਦੁੱਖ ਦੇ ਅੱਜ ਕੱਲ ट्रैफिक नहीं ਟ੍ਰੈਫਿਕ ਨਹੀਂ ਸੀ ਅੱਜ ਕੱਲ ਤੇ ਵਾਇਜਾਂ ਤੇ ਚੜਿਆ ਮੁੱਠੀ ਚ ਸਾਰਾ ਸੰਸਾਰ ਕੀਤਾ ਆ ਸਾਰੇ ਸੰਸਾਰ ਦਾ ਸਮਝੋ ਘਟਿਆਂ ਵਿੱਚ ਦੌੜਾ ਕਰਕੇ ਆ ਜਾਂਦੇ ਨੇ ਉਦੋਂ ਇਸ ਤਰ੍ਹਾਂ ਹੁੰਦਾ ਜਿਹੜਾ ਹਰ ਦوار ਫੁੱਲ ਤਾਰਨ ਜਾਂਦਾ ਲੋਕੀ ਢੂੰਡੇ ਸਨ ਆ ਤੇ ਅੰਥ ਖੋਰੇ ਉਦੋਂ ਹੋਰ ਚੀਜ਼ਾਂ ਹੁੰਦੀਆਂ ਹਨ ਤੇ ਦੋ ਵਾਰੀ ਆ ਕੇ ਸਤਗੁਰਾਂ ਦੇ ਬੜੀ ਦੂਰ ਦਰਾਜ ਤੋਂ ਸੰਗਤਾਂ ਆਉਂਦੀਆਂ ਆਦੀ ਕਾ ਤੇ ਆਏ ਸਵੇਰੇ ਤੇ ਸ਼ਾਮ ਨੂੰ ਤੁਰ ਕੇ ਤੇ ਸ਼ਾਮ ਨੂੰ ਆਏ ਤੇ ਸਵੇਰੇ ਤੁਰ ਗਿਆ ਕੋਈ ਘਾਟਾ ਹੀ ਨਹੀਂ ਟ੍ਰੈਫਿਕ ਦਾ ਪਰ ਉਦੋਂ ਤੁਰ ਕੇ ਆਉਣਾ ਪੈਂਦਾ ਸੀ ਤੇ ਕਾਬਲੋ ਸੰਗਤ ਆਏ ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਮਾਈਆਂ ਦੀਪੀਆਂ ਬੱਚੇ ਫਿਰ ਹੋਰ ਕਈ ਗੁਰੂ ਪਿਆਰੇ ਚੰਗਾ ਜਥਾ ਬਣ ਕੇ ਆਏ ਇਕੱਠੇ ਬਣ ਕੇ ਰਾਹ ਚ ਰਹਿੰਦੇ ਰਾਤਾਂ ਕੱਢਦੇ ਤੁਰਦੇ ਤੁਰਦੇ ਕਈ ਮੰਸਲੇ ਮਾਰਦੇ ਭੁੱਖੇ ਧਰਿਆਏ ਰਹਿੰਦੇ ਸੁਦਾਸਰੋਵਰ ਪਹੁੰਚ ਗਏ ਅੰਮ੍ਰਿਤਸਰ ਪਹੁੰਚ ਗਿਆ ਤੇ ਅੰਮ੍ਰਿਤਸਰੋਂ ਜਿਹੜੀ ਸੜਕ ਲਾਹੌਰ ਨੂੰ ਜਾਂਦੀ ਹੈ ਨਾ ਉਸ ਸੜਕ ਦੇ ਉੱਤੇ ਕੋਈ ਪੌਣੇ ਕੋ 2 ਮੀਲ ਪਰਲੇ ਪਾਸੇ ਇੱਕ ਪਿੱਪਲੀ ਸਾਹਿਬ ਗੁਰਦੁਆਰਾ ਉਸ ਗੁਰਦੁਆਰੇ ਦੇ ਵਿੱਚ ਜਦੋਂ ਪਹੁੰਚੇ ਤੇ ਉਹੋ ਸਮਝੋ ਰਾਤ ਪਾ ਗਈ ਤੇ ਵਾ ਵਾ ਮੇਰਾ ਜਿਆ ਕਈ ਜਿਆਨੇ ਚਲੀਏ ਪਹੁੰਚਾਈਏ ਤੋੜ ਸਤਗੁਰਾਂ ਦਾ ਦਰਸ਼ਨ ਕਰਨੇ ਐ ਏਡੀ ਦੂਰੋਂ ਆਏ ਨੇ ਤੇ ਥੱਕੇ ਸਰੀਰ ਬੱਚੇ ਥੱਕੇ ਮਾਇਆ ਥਕੀਆਂ ਕਿ ਆਂਦੇ ਨੇ ਗੁਰਬਖੋ ਚਲੋ ਔਖੇ ਸੌਖੇ ਕਿਸੀ ਪੌਂਚ ਤੇ ਜਾਵਾਂਗੇ ਠੀਕ ਆ ਥੋੜਾ ਹੀ ਪਿੰਡਾ ਰਹਿ ਗਿਆ ਪਰ ਸਤਗੁਰ ਹੁਣ ਬਰਾਜ ਗਿਆ ਹੋਣਗੇ ਐਸ ਵਕਤ ਉਹਨਾਂ ਨੇ ਕਿੱਥੇ ਦਰਸ਼ਨ ਦੇਣੇ ਨੇ ਐਵੇਂ ਅਸੀਂ ਥੱਕੇ ਹੋਇਆ ਹੋਰ ਔਖੇ ਹੋਵਾਂਗੇ ਤੇ ਹੁਣ ਦਰਸ਼ਨ ਜਾਂਦਿਆਂ ਹੋਣੇ ਨਹੀਂ ਤੇ ਆਪਾਂ ਇੱਥੇ ਬਿਪਲੀ ਸਾਹਿਬ ਗੁਰਦੁਆਰੇ ਪੈ ਜਾਂਦੇ ਆ ਸਾਰੇ ਅਮਰਦੇ ਉੱਠ ਕੇ ਸ਼ਰਾਨ ਕਰਕੇ ਆਸਾ ਜੀ ਦਵਾਰ ਦੇ ਸਤਗੁਰ ਦੇ ਦਰਸ਼ਨ ਕਰਨ ਉੱਥੇ ਤੇ ਉਹਨਾਂ ਆਉਣਾ ਹੀ ਨਾ ਉਥੇ ਤੇ ਉਹਨਾਂ ਨੇ ਨਿਤਨੇਮ ਆ ਇਹ ਇਹਨਾਂ ਜਰੂਰ ਆਉਣੀ ਹੈ ਜਦੋਂ ਬਹੁਤਿਆਂ ਨੇ ਸਲਾਹ ਦਿੱਤੀ ਕਿ ਉਹਨਾਂ ਨੇ ਆਖਿਆ ਚਲੋ ਠੀਕ ਹੈ ਇਸੇ ਤਰ੍ਹਾਂ ਕਰ ਦਾਂਗੇ ਸਾਧ ਸੰਗ ਜੀ ਉਥੇ ਥੱਕੇ ਟੁੱਟੇ ਸਰੀਰ ਸਾਰੇ ਉਥੇ ਪੈ ਰਹੇ ਗੁਰੂ ਅਰਜਨ ਨੂੰ ਪਤਾ ਲੱਗ ਗਿਆ ਤੇ ਮੇਰੇ ਦਰਸ਼ਨਾਂ ਨੂੰ ਸੰਗਤਾਂ ਆਈਆਂ ਯਾਨੇ ਤੇ ਅੱਜ ਉਥੇ ਪੈ ਰਹੀਆਂ ਨੇ ਤੇ ਉਹਨਾਂ ਨੂੰ ਪ੍ਰਸ਼ਾਦਾ ਵੀ ਨਹੀਂ ਆਇਆਂ ਨੂੰ ਮਿਲਣਾ ਉੱਥੇ ਤੇ ਤਕਰੀਬ ਹੋਏਗੀ ਫਿਰ ਸਤਿਪਾਸ਼ਾ ਕੀ ਕਰਦੇ ਨੇ ਕੜਾਪ ਸ਼ਾ ਪਿਆਰ ਕਰਵਾ ਚੰਗਾ ਸੋਹਣਾ ਕੜਾਪ ਸ਼ਾ ਤਰਾ ਬਹੁਤਾ ਕਰਾ ਕੇ ਕੜਾਪ ਸ਼ਾਹ ਤਿਆਰ ਤੇ ਸ਼ਾਲ ਦੀ ਰੁੱਤ ਸੀ ਗਰਮ ਚਾਲ ਕੀਤਾ ਗਰਮ ਜਲ ਕੇ ਇੱਕ ਭਰ ਲਈ ਆ ਤੇ ਵੱਡੀ ਪ੍ਰਾਤ ਖੜਾਪ ਸ਼ਾਹ ਲੈ ਲਈ ਆ ਤੇ ਬਾਬਾ ਬੁੱਢਾ ਜੀ ਨੂੰ ਇਹ ਆਖਿਆ ਬਾਬਾ ਜੀ ਦੱਸਿਓ ਨਾ ਕਿਸੇ ਨੂੰ ਮੈਂ ਕਿ ਸਾਡੇ ਘਰੋਂ ਪਾਪ ਸਾਡੇ ਮਾਤਾ ਜੀ ਗੰਗਾ ਜੀ ਜਿਹੜੇ ਸਰ ਅਸੀਂ דוਵੇ ਦੀ ਉਹਨਾਂ ਦੀ ਜਾ ਕੇ ਸੰਗਤ ਕਰਾਂਗੇ ਤੇ ਸੇਵਾ ਕਰਾਂਗੇ ਤੇ ਕਿਸੇ ਨੂੰ ਦੱਸਿਓ ਨਾ ਕਿ ਮੈਂ ਉਹਨਾਂ ਦੀ ਸੇਵਾ ਕਰਨ ਬਾਬਾ ਜੀ ਕਹਿੰਦੇ ਨੇ ਸਤਿ ਪੱਜਣ ਜੀ ਮੈਨੂੰ ਕੀ ਲੋੜ ਹੈ ਦੱਸਣ